ਲੋਕ ਮਹੱਲਾ ਤੀਜਾ ਜਿਉ ਤਨ ਕੋਲੂ ਪੀੜੀ ਐ ਰਤਨਾ ਹੋਰੀ ਡੇ ਜਿਉ ਵੰਜੈ ਚੌਖੰਨੀ ਐ ਸੱਚੇ ਸੰਧੜੈ ਨੇ ਜੋ ਕੋਲੂ ਪੀੜੀ ਜੇ ਤਨੂ ਕੋਲੂ ਜੀ ਇਹਦਾ ਮਤਲਬ ਇਹ ਨਹੀਂ ਵੀ ਥਨੇ ਖੋਲ ਆਪਾਂ ਸਾਰਾ ਖੂਨ ਇਕੱਠਾ ਹੋ ਕੇ ਕਿਵੇਂ ਵਿੱਚੋਂ ਹਾਂ ਕਰੋ ਜੋ ਇਹ ਤੇਲਾ ਜੋ ਤੇਲ ਨਿਕਲਦਾ ਵੀ ਸਾਰਾ ਤੇਲ ਬਾਹਰ ਆ ਜੂਗਾ ਐਦਾ ਨਹੀਂ ਹੋਣਾ ਫਰੀਦੂ ਕੋਣ ਕੇ ਦੇਖ ਲੈ ਕੋਲੂ ਜੋ ਤਨ ਕੋਲੂ ਪੀੜੀਏ ਰਤਨਾ ਥੋਰੀ ਲੈ ਰੱਖ ਨਹੀਂ ਨਿਕਲਦੀ ਕਿਹਾ ਸੀ ਕੱਢਣੂ ਕਿਉਂ ਵਜ੍ਹਾ ਕਿਉਂ ਖਦੀਏ ਟਕੇ stdcਲੇ ਜੀ ਤੇ ਪਿਆਰ ਪੈ ਜਵੇ ਕਿਉਂ ਖਦੀਏ ਹੋ ਜਾਂਦਾ ਕਦੀ ਆਪਣਾ ਜਿਹੜਾ ਬੇਰੂ ਟੁਕੜੇ ਟੁਕੜੇ ਕਰ ਦੋ ਉਹਲੇ ਟੁਕੜੇ ਕਰ ਲਈ ਜੇ ਆਪਣੇ ਆਪ ਦਾ ਵजूद ਹੀ ਖਤਮ ਹੋ ਜਾਂਦਾ ਮੇਰਾ ਵजूद ਹੀ ਖਤਮ ਹੋ ਜਾਂਦਾ ਕਹਿੰਦਾ ਬੈਠੀ ਕਰਕੇ ਘੱਲਿਆ ਆਪ ਤੇ ਖਾਏ ਪਿਖਾਏ ਆਪ ਦਾ ਵजूद ਨਹੀਂ ਰਹਿੰਦਾ ਪਹਿਲਾਂ ਰੋੜਾ ਹੋਣਾ ਵਾਟ ਕਰਨ ਤੋਂ ਖੇਤ ਬਣਾ ਦੇ ਇਹਦੇ ਫੇ ਕਹਿੰਦਾ ਭਾਵੇਂ ਗੱਲ ਨੂੰ ਘਰ ਫੇਰ ਘਟਾਵਾ ਤੋ ਵੀ ਹੋ ਜਾਵੇ ਜਨ ਜਿਨਾ ਨੇ ਬਾਹਰ ਕੋਲੂ ਜੀ ਫੇਰ ਪੀਦੇ ਨੇ ਉਹਾਂ ਦੀ ਰਤ ਨਹੀਂ ਨਿਕਲੀ ਕਿਸੇ ਬਾਹਰ ਸੀ ਕਹਿੰਦੇ ਨੇ ਲੋਭ ਰੱਤ ਤੇ ਦੂਸਰਾ ਜੀਓ ਵੰਜਾ ਚੌਖੰਨੀ ਹੈ ਸੱਚੀ ਸੁੰਦਰਾਂ ਨੇ ਕਾਲਾ ਬਲੇ ਖੀਰ ਦੀ ਦਿੱਤੀ ਲਾਲੀ ਵਾਲ ਦੇ ਠੀਕ ਹੈ ਕਾਲੇ ਖੀਰ ਦੀ ਰਤ ਤਾਂ ਹੈਗੀ ਆ ਲੋਭ ਕਾਲੇ ਖੀਰ ਦੀ ਰਤ ਇਹ ਤਾਂ ਸਭੋ ਰਤ ਹੈ ਇਹ ਜਿੰਨੀ ਤਾਂ ਸਾਰਾ ਰੱਤ ਦੇ ਬਣਿਆ ਹੈ ਰੱਤ ਦਾ ਕਰਨਾ ਹੋਏ ਰੱਤ ਬਿਨਾਂ ਤਾਂ ਸਰੀਰ ਹੀ ਨਹੀਂ ਬਣ ਸਕਦਾ ਇਹ ਦੀ ਗੱਲ ਨਹੀਂ ਹੈ ਸੱਚੇ ਸੰਦੜੇ ਨੇ ਇਹ ਅੰਦਰਲੇ ਸਰੀਰ ਦੀ ਗੱਲ ਹੈ ਜੀ ਅੰਦਰਲੇ ਸਰੀਰ ਦੀ ਗੱਲ ਹੈ ਅੱਛਾ ਕਹਿਣਾ ਕੀ ਚੋਲਿਆ ਭਾਵ ਕੀ ਅੱਛਾ ਜੀ ਪਾਲ ਲੈਣੀ ਗੱਲ ਹੈ ਜਿਹੜੇ ਬਹਾਲ ਲੈਣਾ ਨਾ ਉਹ ਸਿਰਾ ਮੁੱਕਰ ਸੀ ਕਤਾਵ ਹੈ ਉਹ ਅੰਦਰ ਲਈ ਹੋਣਾ ਹੈ ਪਾਲ ਲੈਣ ਹੋਣਾ ਕਿਥੇ ਹੈ ਕਿ ਬਹਾਲ ਲੈਣੀ ਕਰਨੀ ਹੈ ਉਹ ਹੋਵੇ ਦਾ ਕਾਰਨ ਤਾਂ ਹੈ ਪਰ ਹੁਬੇ ਤਾਂ ਅੰਦਰ ਲਈ ਨੂੰ ਜਿਹੜਾ ਇਹਦੇ ਵਿੱਚ ਬਸਦਾ ਉਹਦਾ ਕਰਨਾ ਨਾ ਨਾ ਸਰੀਰ ਦੀ ਅਸੀਟਾ ਹੋਣਾ ਇੱਕ ਹੋਰ ਹੈ ਨਾ ਬਰਬੀ ਮਾਰ ਸਾਂ ਪਾਲ ਹੀ ਸਾਂਪ ਬਰਬੀ ਨੂੰ ਸਰੀਰ ਨੂੰ ਮਾਰਿਆ ਤੇ ਸਭ ਥੋੜੀ ਬਰਜਣ ਮਾਣਾ ਸੱਤ ਸੀ ਸੱਪ ਮਾਣਾ ਠੀਕ ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇ ਆ ਕਹਿੰਦੇ ਫੇਰ ਦਿਨ ਰਾਤ ਮੇਲ ਚੁੱਕਦਾ ਹੀ ਨਹੀਂ ਲ ਬਿਨੇ ਰਹਾ ਮਾਣੋ ਸਾਬਤ ਰਹੇ ਨੇ ਅੱਛਾ ਆ ਫੇਰ ਮਾਣ ਕਿੱਦਾਂ ਜਾਊਗਾ ਜਾਊਗਾ ਮਹੱਲਾ ਤੀਜਾ ਸੱਜਣ ਮੈਂਡਾ ਰੰਗਲਾ ਰੰਗ ਲਾਏ ਮੰਨ ਲੇ ਜਿਉ ਮਾਜੀ ਠੇ ਕੱਪੜੇ ਰੰਗੇ ਵੀ ਪਾਹੇ ਇਹਦਾ ਬਿਲਕੁਲ ਸੱਜਣ ਬੇਰਾ ਉਹ ਰੰਗ ਰੰਗ ਲਾਏ ਮੰਨ ਲੇ ਉਹ ਆਪ ਰੰਗਲਾ ਹੀ ਸੱਜਣ ਕੀ ਬਾਣ ਵੀ ਰੰਗਿਆ ਜਾਂਦਾ ਕਾਬੂ ਚ ਜਦੋਂ ਮਾਨੋ ਰੰਗਣੀਆਂ ਨਾਲ ਉਹਨਾਂ ਚਲਪੁਰ ਮੇਕਾ ਪੂਰਾ ਦਾ ਜਾਂ ਮਾਨੂ ਵੀ ਰੰਗ ਚੱਲਦਾ ਉਹਦੇ ਆਲਾ ਫਿਰ ਬਣਾ ਗਿਆ ਫਿੱਟ ਕੇ ਚੱਲਣਾ ਉਹਦੀ ਹੋਟਲ ਲੈਣ ਫਿਰ ਉਹਦੇ ਰੰਗ ਲਾ ਲੈਂਦਾ ਲੇ ਫਿਰ ਬਾਦੂ ਉਹ ਵਿੱਚ ਸਮਾ ਜਾਂਦਾ ਕੱਪੜੇ ਜੇ ਬਹੁਤ ਗੂੜੇ ਰੰਗ ਦੇ ਕੱਪੜੇ ਕੋਈ ਪਹਿਨਦਾ ਹੂੰ ਵੀ ਪਾਏ ਰੱਦੇ ਕਾਦਲ ਜੇ ਪਹਾੜ ਚੜਦਾ ਨਾ ਪਾਹੇ ਪਹਾੜ ਉੱਤੇ ਤਾਂ ਆਟਾ ਲਾਉਂਦੇ ਨਾ ਕੱਪੜੇ ਨੂੰ ਇਹ ਕੀ ਉੱਤੇ ਪੈਣਾ ਰੰਗ ਨਹੀਂ ਕਰ। ਨਾਲੇ ਪਾਹੇ ਬਾਹਰ ਕੋਲੇ ਕੱਪੜੇ ਨੂੰ ਰੰਗ ਨਹੀਂ ਚੜਦਾ। ਪਹਿਲਾਂ ਆਟਾ ਲਾਉਣਾ ਪੈਂਦਾ। ਆਟਾ ਲਾਉਣਾ ਪੈਂਦਾ। ਫਿਰ ਉਹ ਆਟਾ ਦੇ ਉੱਤੇ ਵੀ ਰੰਗ ਚੜਦਾ। ਉਹ ਇਹਨਾਂ ਪਾਹ ਲੱਗਦਾ। ਬਾਹਾਂ ਦਾ ਪਾਹ ਲਾਉਣਾ ਪੈਂਦਾ। ਬਾਹਾਂ ਦਾ ਪਾਹ ਹੀ ਵਧੀਆ ਹੋਵੇ। ਹੇਤਾਂ ਬਾਆ ਪਾਹਿਆ ਪਹਿਲੇ ਨੀਤ ਦਾ ਲੱਭ ਰਾਇ ਲੋਭ ਦਾ ਨਕ ਚੁਟੜਿਆ ਮਾਇ ਦਾ ਪਾਹ ਅਸਰੀਰ ਜਿਹੜਿਆ ਹੈ ਮਾਇ ਦਾ ਨਾ ਉਤਰੈ ਬੀਅਾਂ ਨ ਲੱਗਿਆ ਕਿ ਪ੍ਰੇਮ ਦਾ ਕੇ ਰੰਗਿਆ ਪ੍ਰੇਮ ਇੱਕ ਕਰਦਾ ਹੈ ਨੂੰ ਪ੍ਰੇਮ ਦਾ ਬਣਾ ਇੱਕ ਹੁੰਦਾ ਪਾ ਲੱਗਦਾ ਜਿਹੜੇ ਆਉਂਦਾ ਜਿਹੜੇ ਆ ਚੜ੍ਹਨ ਚੱਲ ਜਾਂਦੇ ਜੇ ਜਿਹੜੇ ਨਹੀਂ ਆਉਗਾ ਤੇ ਰਬੂ ਭਗਤ ਨੰਨ ਵਾਲਾ ਜਿਹੜਾ ਤੇ ਸਾਹਿਬ ਸਾਹਿਬ ਕਾਲਮੂਗਾ ਜੇ ਉਹਦੇ ਕੋਲ ਆਊਗਾ ਆਉਗਾ ਕਦ ਪ੍ਰੇਮ ਬੁਲਾਈ ਰਲੀ ਪ੍ਰੇਮ ਦਾ ਬੁਲਾਈਏ ਪ੍ਰਿੰਤਾਂ ਦੇ ਸ਼ਬਦ ਅਨੰਦ ਲਾਲ ਰਤੀ ਲਲੀਪਈ ਗੁਰਮੁਖੀ ਭਈ ਸਾਡੇ ਕੋਲ ਹੋਰ ਬਾਣ ਦੇ ਸਾਡੇ ਵਿੱਚ ਦੇ ਤਾ ਅਸੀਂ ਪੰਕਤੀ ਦੇ ਅਰਥ ਕਰਦੇ ਹਾਂ ਬੰਦੋ ਜੀ ਪਤਾ ਲੱਗਦਾ ਹੈ ਕੇ ਜੇ ਆਪ ਬਹਿ ਜਿਓ ਅਰਥ ਨਹੀਂ ਕੀਤੇ ਜਾ ਸਕਦਾ ਹਾਂ ਜੀ ਫੋੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਇੰਦਾ ਫਰ ਆਪੇ ਸ੍ਰਿਸ਼ਟ ਸਵਾਰ ਸਿਰਤਨ ਦੇ ਲਾਇੰਦਾ ਹਰ ਆਪ ਵਰਤੈ ਆਪ ਆਪ ਇਹ ਹਰ ਹਰ ਸਭ ਦੇ ਅੰਦਰ ਸਤਰਾ ਕੋਈ ਵਰਤਦਾ ਅਸਲ ਦੇ ਵਿੱਚ ਬੰਤਾ ਉਹ ਨਹੀਂ ਜੋ ਉਹਦਾ ਹੀ ਬਣਨਾ ਹੈ ਉਹਦਾ ਬਣਨਾ ਹੈ ਮੇਰਾ ਬਣ ਮੇਰੇ ਹੀ ਕਾਬੂ ਆ ਗੱਲ ਹੈ ਆਪਣਾ ਬਣ ਆਪ ਹੀ ਕਾਬੂ ਕਰ ਆਪ ਵਰਤ ਹੈ ਹਰ ਤੋਂ ਆਪਣੇ ਵਰਤ ਵਿੱਚ ਉਹ ਵੀ ਇਹ ਕਿਤੇ ਨਹੀਂ ਆਪ ਪਰ ਆਪ ਬੁਲਾਉਂਦਾ ਆਪਣੇ ਬਣ ਨੂੰ ਬੁਲਾਉਂਦਾ ਨਾ ਮਨ ਨੂੰ ਆਪ ਬੁਲਾ ਕੇ ਆਪਣੇ ਕੋਲ ਲਿਆਉਣੇ ਆਪੇ ਸੁਝਾਉਣੇ ਆਪਣੇ ਕੋਲ ਨੂੰ ਆਪ ਸੁਝਾਉਣੇ ਬਾਅਦ ਹੀ ਤੇ ਕੋਣ ਵਰਦੇ ਹੋ ਆਪ ਆਪੇ ਹੀ ਬੁਲਾਉਂਦੇ ਜੀ ਹੱਥ ਤੇ ਸਵਾਰ ਆਪ ਹੀ ਸਮਾਰ ਦਾ ਆਪਣਾ ਦਾ ਆਪੇ ਉਹ ਸਾਰਿਆਂ ਦੇ ਅੰਦਰ ਹਰ ਬੈਠਾ ਹਰ ਤੇ ਬਰਨ ਸ੍ਰਿਸ਼ਟੀ ਚਬਰਦੀ ਦੀਏ ਤਾਂ ਜੇ ਪਰਦਾਨ ਹੋ ਜੂ ਸ਼ੇਸ਼ੀ ਵਧਦੀ ਆ ਜਨਮ ਵਧਦਾ ਹੈ ਜੇ ਹਰ ਪਰਦਾਨ ਹੁਪਾ ਸ਼ੇਸ਼ੀ ਨਾਲ ਸਾਡੀ ਭਗਤੀ ਲਾਏ ਇੱਕ ਆਪ ਖਵਾਇੰਦਾ ਇਕਨਾ ਮਾਰਗ ਪਾਏ ਇੱਕ ਉਜੜ ਪਾਏਗਾ ਇਤਨਾ ਭਗਤੀ ਨਾਲ ਆ ਖੜੇ ਆ ਫਰਤ ਉਹ ਖਾਤ ਉਹ ਤਾਂ ਫਿਰ ਉਹ ਦੁਨੀਆ ਦੇ ਖੋ ਗਏ ਔਰ ਆਪ ਹੁ ਗਏ ਕਿ ਕਾਪ ਕੋਈ ਨਾ ਕਰਨ ਨਾ ਕੌੜ ਜੜ ਪਾਣ ਦਾ ਜਿਹਨਾਂ ਨੂੰ ਮਾਰਗ ਪਾਤਾ ਇੱਕ ਨੰ ਮਾਰਗ ਪਾਤਾ ਇੱਕ ਨੰ ਰੋਡ ਪਾਤਾ ਉਹ ਜਿਹੜਾ ਉਹਨਾਂ ਨੂੰ ਪਾਤਾ ਜਿਹਨੂੰ ਬੁੱਧੀ ਤੋਂ ਕਾਬੂ ਨਹੀਂ ਲਿਆ ਦੀਪ ਕੋਲੇ ਜਿਹੜੇ ਬੁੱਧੀ ਤੋਂ ਕਾਬੂ ਨਹੀਂ ਲੈਂਦੇ ਉਹ ਸਿੱਧੇ ਰਾਹ ਪਾ ਜਾਂਦੇ ਜਿਹੜੇ ਨਹੀਂ ਕਾਬੂ ਲੈਂਦੇ ਉਹ ਤਾਂ ਕਾਬੂ ਲੈ ਉਹ ਮਾਰਗ ਪੈ ਜਾਂਦੇ ਤੂੰ ਇੱਕ ਮਾਰਗ ਹੈ ਇੱਕ ਕੁਮਾਰ ਹੈ ਪਰ ਉਹ ਪੈਂਦਾ ਨੇ ਜਿਹੜੇ ਬੁੱਧੀ ਤੋਂ ਕਾਬੂ ਨਹੀਂ ਲੈਂਦੇ ਡਬਲੇ ਦੇ ਕੁਮਾਰ ਪੌਣਾੜਾ ਤੇ ਬਹੁਤ ਰੇ ਜਾਨੀ ਬੱਤਾ ਕੁਮਾਰ ਪੌਣਾੜਾ ਦੇ ਤੇ ਐਸੀ ਮਤ ਨੂੰ ਬੰਨ ਲੈਣ ਤੇ ਜਿਹੜੀ ਬਾਦ ਦੇ ਵਿੱਚੋਂ ਪਛਾਣਨ ਹੋਰ ਸੀ ਤਾਂ ਵਿਚਾਰੇ ਹੀ ਨਹੀਂ ਪਹਿਲਾਂ ਦੱਸਿਆ ਹੋਇਆ ਬੰਦੀ ਬੁੱਧ ਸੱਚੇ ਹੋਵੇ ਬੰਦੀ ਲੋਕ ਦੇ ਜੇ ਸੁਲਤਾਨ ਨਾਲ ਨਾਲ ਦੇ ਖਿਲਾਫ ਨਹੀਂ ਬੋਲਣਾ ਇਹੋ ਜੂ ਉਹ ਫਿਰ ਪੋਕ ਡਰਦੇ ਨੇ ਡਰਾਏ ਹੋਏ ਸੁਲਤਾਨ ਆਹ ਦੇ ਜਾ ਭੂਗਲਵੀਆ ਸੰਤ ਦੀ ਫਿਰ ਉਹ ਅਸੀਂ ਤਾਂ ਸੁਣੀ ਆਈ ਦੀ ਹੈ ਬਸ ਠੀਕ ਹੈ ਜੀ ਫਿਰ ਆਪਣੀ ਗਲਤੀ ਵੀ ਜਨ ਨਾਮਿਕ ਨਾਮ ਧਿਆਏ ਗੁਰਮੁਖੀ ਗੁਣ ਗਾਇੰਦਾ ਦਾ ਨੇ ਕਿ ਆਪਣੇ ਸਤਨ ਧਿਆਨ ਦੇ ਹੈ ਇਹਦਾ ਆਪਣੇ ਗਹਿਰਬਾਨਾਂ ਵਿੱਚ ਜਿੰਨੀ ਵਾਂ ਕਰਦੇ ਜਿਹੜਾ ਦੇਖ ਰਿਹਾ ਹੈ ਉਹ ਉੱਥੇ ਪਹੁੰਚਿਆ ਇਸ ਵਕਤ ਉਹ ਪਹੁੰਚੇ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਸਮਾਪਤੀ ਹੈ ਜੀ